ਹਾਂਜੀ ਛਜੇ ਅੱਖਰ ਤੋਂ ਵਿਦੇਸ਼ ਹੈਗਾ ਜੀ ਭਗਤ ਕਬੀਰ ਜੀ ਦਾ 15 ਨੰਬਰ ਪੌੜੀ ਚ ਜੀ ਛਜਾ ਉਰਜ ਸੁਰਜ ਨਹੀ ਜਾਨਾ ਰਹਿਓ ਛਜਕ ਨਾਹੀ ਪਰਵਾਨੋ ਛਜਾ ਇਹਦੇ ਸੁਰਜੀ ਨਹੀਂ ਜਾਨੋ ਆਪਣੇ ਆਪ ਨਹੀਂ ਥੋੜੀ ਸਾਦੀ ਜਿਹੜਾ ਕੋਈ ਕਿਸੇ ਗੱਲ 'ਚ ਉਹਨੂੰ ਆਪਣੇ ਆਪ ਸੁਰਜ ਕਿਸੇ ਗੱਲ ਨੂੰ ਆਪਾਂ ਤਾਂ ਮੁਸ਼ਕਲ ਆਪਣੇ ਆਪ ਉਹਨੂੰ ਕੋਈ ਦੂਸਰਾ ਸਮਝਾਉਂਦਾ ਫਿਰ ਇਹ ਇਥੋਂ ਦੂਰਾ ਭੁੱਲ ਗਿਆ ਭਾਈ ਅਸਾਂ ਲੈ ਨਹੀਂ ਆਏ ਉਹ ਨਹੀਂ ਸੁਰਜੇ ਨਹੀਂ ਜਾਣਾ ਰਾਇਓ ਚੱਕਰ ਨਹੀਂ ਪਰਵਾਨਾ ਗੱਲ ਮਾਇਆ ਦੇ ਵਿੱਚ ਸਰੀਰ ਆ ਮੂਰਤੀ ਬਣਾ ਬੈਠਿਆ ਜੋ ਤਾ ਉਹ ਮੂਰਤੀ ਬਣਾ ਬੈਠਿਆ ਉਹਦੀ ਘਰ ਜਾਤੀ ਗੱਲ ਉਹ ਸਮਝਾਵੇ ਕੌਣ ਸੁਰਜੇ ਨਹੀਂ ਸਮਾ ਆਪਣੇ ਆਪ ਚੱਖ ਮਾਰੀ ਜਾਂਦਾ ਅਰਥਾਂ ਨੇ ਇੱਕ ਵਾਰ ਨਾਤ ਕਰ ਚੁੱਕਿਆ ਹੁਣ ਚੱਖ ਮਾਰਦਾ ਗੱਲ ਉਹ ਤੇ ਬਣਦੀ ਨਹੀਂ ਔਰ ਜਿ ਸੁੱਧ ਲਈ ਜਾਣਾ ਅਰੇ ਉਹ ਚੱਕ ਕੋ ਚੱਖ ਮਾਰਦਾ ਹੋ ਰਹੀ ਤੇਰਾ ਹੀ ਨਹੀਂ ਮੰਨ ਮੰਨ ਰਿਹਾ ਇਹ ਵੀ ਠੀਕ ਹੈ ਗੱਲ ਮੈਨੂੰ ਰਾਹ ਮਿਲ ਗਿਆ ਪਰਵਾਹ ਨਹੀਂ ਹੋ ਰਹਾ ਤੇਰਾ ਹੀ ਨਹੀਂ ਮੰਨ ਮੰਨ ਰਿਹਾ ਹੁਣ ਆਪ ਦੁਨੀਆ ਬਣੀ ਹਾਂਜੀ ਸੱਤ ਚੱਕ ਚੱਕ ਔਰਨ ਸਮਝਾਵਾ ਝਗੜ ਕੀਏ ਝਗਰੋ ਹੀ ਪਾਵਾ। ਸੱਤ ਜਾਂਦੇ ਕੀ ਫਾਇਦਾ? ਜ਼ਬਰਦਸਤੀ ਕਹੀ ਜਾਂਦਾ ਹਾਂ ਕਹਿ ਦੋ ਮੰਨ ਲਓ ਵਿਦਰਸ਼ਨ ਹੋ ਗਿਆ ਦਰਸ਼ਨ ਹੋ ਗਿਆ। ਝਗੜ ਕੀਓ ਝਗਲੋ ਹੀ ਪਾਵਾ। ਗੱਲ ਝਗੜੇ ਚ ਐ। ਉਹਨਾਂ ਦਾ ਮਨ ਨਹੀਂ ਮੰਨ ਰਿਹਾ ਹੋਰ ਵੀ ਲੋਕ ਤੁਹਾਡੇ ਤੇ ਤੇਰੀ ਗੱਲ ਨੂੰ ਗਲਤ ਸਾਬਤ ਕਰ ਤੂੰ ਤਸੱਲੀ ਨਹੀਂ ਕਰਾ ਰਿਹਾ ਉਹਨਾਂ ਦੇ ਜਵਾਬ ਤਰਕਾਂ ਦੇ ਨਹੀਂ ਦੇ ਆ ਕਰ ਰਹੇ ਨਾ ਉਹ ਸਹੀ ਨੇ ਨਾ ਤੂੰ ਸਹੀ ਆ ਝਗੜਾ ਖਰੀਦਿਆ ਸਾਰੀ ਦੌੜ ਇਹ ਵਿਦਵਾਨ ਜਿਹੜੀ ਗੱਲ ਦਾ ਝਗੜਾ ਪਾ ਲੈਣੇ ਤਾਂ ਤੇ ਭੁੱਖਦਾ ਹੀ ਨਹੀਂ ਹੁੰਦਾ ਕਦੇ ਵੀ ਉਹ ਮੁਕੇ ਨਾ ਤਾਂ ਉਹ ਮੁਕੇ ਹਾਂਜੀ ਘੱਟ ਚੱਕ ਚੱਕ ਸਮਝਾਵਾ ਝਗੜ ਕੀਏ ਝਗਰੋਹੀ ਪਾਵਾ ਇਹ ਆਪ ਬਿੰਦੀ ਕਾਦੇ ਨਹੀਂ ਲਾਉਂਦੇ ਜੇ ਪਾਵਾ ਹੋ ਜੂ ਤਾਂ ਆਪਣੇ ਆਪ ਤੇ ਆ ਜੂ ਗੱਲ ਅੱਛਾ ਜੀ ਕਬੀਰ ਥੋੜੀ ਸਮਝਾ ਰਿਹਾ ਨੂੰ ਜੇ ਬਿੰਦੀ ਲਾ ਦੀਏ ਕਬੀਰ ਤੇ ਗੱਲ ਜਰੀ ਜਾਊ ਅੱਛਾ ਜੀ ਵੀ ਮੈਂ ਮੈਂ ਹੀ ਝਗੜਾ ਪਾ ਰਿਹਾ ਹਾਂ ਤੇਰੀ ਬੁੱਧੀ ਉੜ ਹੋਈ ਐ ਜੋਗੀ ਦੀ ਵੀ ਬੁੱਧੀ ਉੜ ਜਈ ਹੋਈ ਐ ਸੋਲਣਾ ਜਾਣਦੀ ਉਸ ਵੇਲੇ ਦੀ ਨੂੰ ਕਹਿ ਰਹੇ ਨੇ ਜਿਹੜੀ ਔੜੇ ਦੇ ਵਿੱਚ ਸੁਲਝ ਨਹੀਂ ਜਾਂਦੀ। ਕਿ ਅਗਰ ਇਹੋ ਝਗੜਾ ਸੀ ਤਾਂ ਬਾਪਾ ਹੁਣ ਬਾਹਰ ਝਗੜਾ ਕਰਦੇ ਨੇ ਦੂਜਿਆਂ ਮਤ ਬੱਤਾ ਨਾਲ। ਜੇ ਅਸੀਂ ਠੀਕ ਹਾਂ ਉਹ ਮਾਰ ਕੇ ਦਲੀਲਾਂ ਦੇ ਦੇ ਕੇ ਉੱਠ ਪਣਾ ਉਹਨਾਂ ਦਾ ਮਨ ਮੰਨ ਨਹੀਂ ਰਿਹਾ। ਤਸੱਲੀ ਕਿਸੇ ਦੀ ਹੋ ਨਹੀਂ ਰਹੀ। ਇਹ ਗੱਲ ਸਾਰਿਆਂ ਨੂੰ ਕਹਿ ਰਹੇ ਨੇ। ਜੋਗੀਆਂ ਨੂੰ ਵਿੱਚ ਪੰਡਤ ਨੂੰ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਕਹਿ ਰਹੇ ਨੇ। ਅਚਕਤ ਚਖ ਚਖ ਔਰਨ ਸਮਝਾਵਾ ਵੀ ਤੁਸੀਂ ਹੋਰਾਂ ਨੂੰ ਸਮਝਾ ਰਹੇ ਹੋ ਹਾਂ ਸਮਝਾ ਜਿਹੜਾ ਤੁਸੀਂ ਚਖ ਮਾਰਦੇ ਹੋ ਦਾ ਕੀ ਫਾਇਦਾ ਪਹਿਲਾਂ ਆਪ ਤਸਦੀਕ ਕਰ ਲੋ ਵੀ ਗੱਲ ਠੀਕ ਹੈ ਫਿਰ ਕਹਦੇ ਹੋ ਜਿਵੇਂ ਉਹਨਾਂ ਮਨ ਪਰਬੋਧਾ ਆਪਣਾ ਪਾਛਿਆ ਬਰਝਾਵਾ ਇਸੇ ਗੱਲ ਤੇ ਉਹ ਗੱਲ ਕਿਹ ਹੋਈ ਹੈ ਪਹਿਲਾਂ ਤੁਸੀਂ ਆਪਣੇ ਮਨ ਪਰਬੋਧ ਲੋ ਮਨ ਮੰਨ ਲਿਆ ਤੋ ਕਹਿੰਦਾ ਭਾਵ ਹੈ ਕਿ ਇਹ ਸੈਕੰਡ ਪਰਸਨ ਚੋ ਗੱਲ ਕਰ ਰਹੇ ਆਂ ਜੇ ਸਮਝਾਵਾ ਤੇ ਪਾਵਾ ਤਾਂ ਫਿਰ ਫਰਸਟ ਪਰਸਨ ਚ ਹੋ ਜਾਂਦੀ ਹੈ ਹਾਂ ਫਿਰ ਫਰਸਟ ਪਰਸਨ ਆ ਜੂਗੀ ਪਰ ਇਹ ਹੋ ਜੂਗਾ ਵੀ ਕਬੀਰ ਜੀ ਆਪੇ ਝਗੜਾ ਪਾ ਰਹੇ ਆਂ ਜੀ ਫਿਰ ਤਖਵੀਰ ਵੀ ਖੁਦੇ ਝਗੜਾ ਪਾ ਲੇ ਠੀਕ ਹੈ ਜੇ ਤਾਂ ਪੜਨਾ ਪਊਗਾ ਕਤ ਝਗ ਬਿੰਦਰੀ ਗੱਲ ਵੀ ਝਗੜੇ ਚ ਹੈ ਬੁੱਲਾਂ ਦੀ ਗੱਲ ਵੀ ਝਗੜੇ ਚ ਹੈ ਚੜੜਾ ਉੜਿਆ ਹੋਏ ਨੇ ਧੋਈ ਔਰਨ ਸਮਝਾਵਾਂ ਝਗੜ ਕੀਏ ਝਗਰੋਹੀ ਪਾਵਾਂ ਇਹ ਗਲਤ ਹੈ ਜੀ ਇਹ ਲਈ ਬਣ ਸਕਦੀ ਗੱਲ ਫਿਰ ਤਾਂ ਆਪਣੇ ਨਾਲ ਆਬਲੀ ਇਹ ਗੱਲ ਹਾਂਜੀ ਬਿੰਦਰੀ ਵਰਤੋਂ ਬਹੁਤ ਉਹ ਸਮਝ ਕੇ ਕਰਨੀ ਹੈ ਜੀ ਹਾਂਜੀ ਹਾਂਜੀ ਇਹ ਕਹੇ ਜੀ ਹੁਣ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈਗਾ ਜੀ ਆਸਾ ਪੱਟੀ ਮਹਿਲਾ ਪਹਿਲਾ ਚ ਜੈ ਝੂਰ ਮਰੋ ਕਿਆ ਪ੍ਰਾਣੀ ਜੋ ਕਿਛ ਦੇਣਾ ਸੋ ਦੇ ਰਹਾ ਉਹ ਕਹਿੰਦੇ ਤੂੰ ਕਿਉਂ ਝੂਰਦਾ ਹੈ ਜਿਹੜਾ ਉਹ ਦੇ ਹੀ ਰਿਹਾ ਤੇ ਤੋਹਾਂ ਦੇ ਝੂਰ ਜਨ ਮੇਲੇ ਘੱਟ ਦਿੰਦਾ ਵੱਧ ਦਿੰਦਾ ਉਹ ਦਿੰਦਾ ਬੰਦਾ ਘਰ ਕਹਿੰਦਾ ਘੱਟੇ ਦਿੰਦਾ ਕਹਿੰਦਾ ਤੂੰ ਝੂਰ ਨਾ ਜਿੰਨਾ ਤੈਨੂੰ ਦਿੰਦਾ ਨਾ ਉਹ ਚ ਤੂੰ ਸੰਤੋਖ ਰੱਖ ਸਬਰ ਰੱਖ ਜਿਆਦਾ ਮਾਇਆ ਖਰਾਬ ਕਰਦੀ ਹੁੰਦੀ ਹੈ ਹਾਂਜੀ ਦੇ ਦੇ ਹੁਕਮ ਚਲਾਏ ਜੀਓ ਜੀਆਂ ਦਾ ਰਿਜਕ ਪਿਆ ਉਹ ਦੇ ਦੇ ਦੇਖਦਾ ਸਾਰਿਆਂ ਨੂੰ ਦੇਖਦਾ ਜਿੱਥੇ ਜਿੱਥੇ ਦੇ ਥਰੂ ਗਾਂ ਪਚਾਉਂਦਾ ਉਹਨੂੰ ਦੇ ਨਿਗਾਹ ਵੀ ਜਿੱਥੇ ਜਿੱਥੇ ਦੇ ਰਹੇ ਆ ਰਿਜਕ ਜਿਹੜਾ ਜੀਵ ਦਾ ਉਹ ਵੀ ਤਾਂ ਕਿਸੇ ਦੇ ਥਰੂ ਪਚਾਉਣਾ ਉਹਨੇ ਜੇ ਕਿਸੇ ਦੇ ਖੇਤ ਚ ਹਜ਼ਾਰ ਕੁੰਟਲ ਕਣਕ ਹੋਗੀ ਪਹਿਲਾਂ ਉਹਨੇ ਥੋੜੀਆ ਖਾਣ ਪੂਰੀ ਖਾਣੀ ਹੈ ਇਹ ਉਹਦੇ ਖਾਣੀ ਸਾਰੇ ਜੀ ਆਲੀ ਗਾਣੀ ਹੈ ਉਹ ਤਾਂ ਖਾ ਸਕਦਾ ਬਾਕੀ ਠੀਕ ਹੈ ਇਹਦੇ ਆ ਰਿਹਾ ਹੈ ਉਹ ਜੀ ਆਲ ਦੇ ਦੂਜਿਆਂ ਨੂੰ ਰ지ਕ ਪਹੁੰਚਾਉਣੇ ਉਹਦੇ ਜ ਵੱਲ ਐ ਤਾਂ ਉਹਨੇ ਹੋਰ ਕਿਸੇ ਦਾ ਦੱਸਤਾ ਉਹਨੂੰ ਉੱਥੇ ਇਹ 12 ਨੰਬਰ ਪੌੜੀ ਦਾ ਉਪਦੇਸ਼ ਸੀ ਜੀ ਹੁਣ ਆਸਾ ਪੱਟੀ ਮਹੱਲਾ ਤੀਜਾ ਜੀ ਝੱਜ ਕਦੇ ਨਾ ਝੂਰੇ ਮੂੜੇ ਸਤਗੁਰੂ ਦਾ ਉਪਦੇਸ਼ ਸੁਣ ਤੂੰ ਵਿਖਾ ਓਹ ਰਹਿ ਜੇ ਸਤਗੁਰੂ ਦਾ ਉਪਦੇਸ਼ ਸੁਣ ਲਵੇ ਤੈਨੂੰ ਝੂੜਦਾ ਹੀ ਨਹੀਂ ਫਿਰ ਉਹਨਾਂ ਨੇ ਕਹ ਤੂੰ ਝੂੜਦਾ ਲਾਜੂਰ ਉਹ ਕਹਿੰਦੇ ਝੂੜਦਾ ਤਾਂ ਐ ਸਤਗੁਰੂ ਦਾ ਉਪਦੇਸ਼ ਨਹੀਂ ਸੁਣਿਆ ਇਹਨੇ ਇਹ ਤੂੰ ਸਤਗੁਰੂ ਦਾ ਉਪਦੇਸ਼ ਸੁਣ ਲਵੇ ਫਿਰ ਤੂੰ ਝੂੜਦਾ ਹੀ ਨਹੀਂ ਹੈਗਾ ਹਾਂ ਸੋ ਉਹਨਾਂ ਨੇ ਕਹਾ ਕਹਿਤੀ ਗੱਲ ਝੂੜਨ ਦਾ ਕਾਰਨ ਹੈ ਸਤਗੁਰੂ ਦਾ ਉਪਦੇਸ਼ ਨਹੀਂ ਸੁਣਿਆ ਕੋਈ ਗੱਲ ਨਹੀਂ ਸੁਣੀ ਔਰ ਸਮਝੀ ਨਹੀਂ ਤਾਂ ਝੂੜਦਾ ਹਾਂਜੀ ਗੁਰੂ ਕੋ ਵਿਦੇਸ਼ ਸੁਣ ਤੋਂ ਵਿਖਾ ਵਿਖਾ ਕੀ ਹੁੰਦਾ ਜੀ ਵਿਖਾ ਦਾ ਮਤਲਬ ਹੈ ਸਭ ਕੁਝ ਸਮਝ ਆ ਜਾਊਗੀ ਦਿਖ ਜਾਊਗਾ ਤੈਨੂੰ ਕਿਉਂ ਦੱਤਾ ਕਿਉਂ ਤੈਨੂੰ ਤੈਨੂੰ ਇਹ ਨਹੀਂ ਸਮਝ ਆਊਗਾ ਭਾਈ ਵਿਖਾ ਦੇਣਾ ਦਿਖਾ ਦੇਣਾ ਜੇ ਹੁੰਦਾ ਨਾ ਉਹਦੀ ਸੈਂਸ ਚ ਲਿਆ ਹੈ ਅੱਛਾ ਜੀ ਗੁਰੂ ਤੈਨੂੰ ਦਿਖਾ ਰਿਹਾ ਸਭ ਕੁਝ ਵੀ ਕਿਉਂ ਦੱਤਾ ਉਹ ਤੈਨੂੰ ਕਿਉਂ ਨਹੀਂ ਦੱਤਾ ਤੇ ਆ ਹੋਰ ਜਿਆਦਾ ਦੱਤਾ ਉਹ ਦਿਖਾਇਆ ਤੈਨੂੰ ਦੱਸਦਾ ਦੱਸਦਾ ਵੀ ਹੋਰ ਜੀ ਆਂਦਾ ਉਹ ਤੇਰਾ ਉਹਦਾ ਕਹਿ ਦਿੱਤਾ ਤੈਨੂੰ ਲਾਈ ਉਹਨੇ ਸੰਤੋਖ ਚ ਰਹਿ ਗੁਰ ਨਹੀਂ ਕੋਈ ਨਗੁਰੇ ਕਾਹੇ ਨਾਉ ਬੁਰਾ ਸਤਗੁਰਾ ਉਹੀ ਗੁਰ ਦੇ ਵਸਲੀ ਬਾਕੀ ਤਾਂ ਰਗੁਰੇ ਗੇ ਨਗੁਰੇ ਕਾਹੇ ਨਾਉ ਬੁਰਾ ਰਗੁਰਾ ਜਿਹੜਾ ਉਹਦਾ ਤਾਂ ਗਿਆਨ ਜਿਹੜਾ ਹੈ ਗੁਰਾ ਉਹ ਤਾਂ ਫੁਰੀ ਦਿੰਦਾ ਹੈ ਪਤਾ ਨਹੀਂ ਕਿ ਹੋਰ ਨੇ ਸਿੱਖਿਆ ਦਿੱਤੀ ਜਿਹੜੀ ਹੋਰ ਦੀ ਸਿੱਖਿਆ ਉਹਨੇ ਤੇਰਾ ਸਦੋਖ ਭੰਕ ਕੀਤਾ ਹੋਇਆ। ਕਹੇ ਕੇ ਕੋਈ ਗੁਰ ਲਿਖਿਆ ਜੀ ਸਤਗੁਰ ਬਾਝੋਂ ਗੁਰ ਨਹੀਂ ਕੋਈ। ਸਾਧਗੁਰ ਤੇ ਬਾਝੋਂ ਕੋਈ ਹੋਰ ਗੁਰ ਜਿਹੜਾ ਮਨਮਗਨ ਹੋ ਰਹਾ ਹੁੰਦਾ ਛਾਕ ਦੇ ਲਗੋਰਾ ਹੁੰਦਾ ਪਰ ਗੁਰੂ ਬਣੇ ਹੋਏ ਆਪ ਜਿਹੜਾ ਆਪ ਗੁਰੂ ਬਣ ਅਸਲ ਵਿੱਚ ਲਗੋਰਾ ਹੈ ਉਹ ਜੋ ਗਿਆਨ ਦੇ ਰਿਹਾ ਉਹ ਬੁਰਾ ਕਰ ਰਿਹਾ ਤੇਰਾ ਪਰ ਇਹ ਜਿਨ੍ਹਾਂ ਨੇ ਪਹੁੰਚ ਲਈ ਹੁੰਦੀ ਹੈ ਉਹ ਕੁਛ ਇਸ ਤਰ੍ਹਾਂ ਦੇ ਬਚਨ ਕਰਦੇ ਆ ਜੇ ਦੂਸਰਿਆਂ ਖਿਲਾਫ ਵੀ ਆਹ ਵਾਲੀ ਪੰਕਤੀ ਵਰਤਦੇ ਆ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨਿਗੁਰੇ ਕਾਹੇ ਨੋਂ ਬੁਰਾ ਅਕਾ ਜੇ ਗੁਰਬਾਣੀ ਨੂੰ ਮੰਨਦੇ ਨੇ ਆਪਣੇ ਅੰਦਰ ਵਾਲੇ ਨੂੰ ਅੰਦਰ ਹੀ ਵਕਾ ਦਾ ਬਾਤ ਦੇਖਦੇ ਉਹਨਾਂ ਨੂੰ ਗੁਰਬਾਨੀ ਨਹੀਂ ਸਮਝ ਆਇਆ ਕੌਣ ਨਾਲ ਦੀ ਗੁਰਬਾਨੀ ਸਮਝ ਆਉਣੀ ਥੱਲੇ ਵਿੱਚ ਪੌੜ ਤਾਂ ਇਹਨਾਂ ਨੇ ਦਾਅਲਾ ਹੁਣ ਬਣਾ ਲਿਆ ਕੌਣ ਤਾਂ ਉਹਨੂੰ ਦਿੱਤੀ ਸੀ ਜਿਹਨੂੰ ਗੁਰਬਾਨੀ ਦੀ ਪੂਰੀ ਸਮਝ ਆ ਚੁੱਕੀ ਸੀ ਉਹਨਾਂ ਜੋ ਦਾਖਲੇ ਵਿੱਚ ਪਰੌਣ ਦੇਂਦੇ ਨੇ ਪਹਿਲਾਂ ਹੀ ਜੇ ਜੇ ਆਪਰੇ ਲੋਹੇ ਜਿਹਨਾਂ ਦੇ ਪੌਣ ਦੇਣ ਵਾਲੇ ਨੇ ਉਹ ਜਿਹੇ ਗਾਣ ਪੌਣ ਲੈਣੇ ਆਲੇ ਨੇ ਫਿਰ ਤਾਂ ਗੱਲੇ ਕਰਨ ਦੀ ਕੋਈ ਸਹੀ ਨਹੀਂ ਜਿਹਨਾਂ ਨੂੰ ਪੌਣ ਦਿੱਤੀਆ ਪੰਗੇ ਪਾਸ ਸੀਗੇ ਪਹਿਲਾਂ ਇੰਤਾਨ ਲਿਆ ਪਾਸ ਹੋ ਗਏ ਤਣ ਗੋੜ ਦਿੱਤੀ ਏ ਜੀ ਤੋਂ ਪਾਸ ਕੀਦਾ ਇਮਾਨਤ ਨੇ ਇਹ ਲਾਲ ਚਿੱਟੇ ਦੇ ਰਿਪੋਰਟ ਲੈ ਕੋਈ ਨੇ ਸਨ ਆਪਣੀ ਦਈ ਜਾਂ ਕੋਈ ਕਹਿੰਦਾ ਮੈਂ ਪਿੰਡ ਵਾਲਾ ਛਕਿਆ ਕੋਈ ਕਹਿੰਦਾ ਮੈਂ ਨਾਮਦਾਰੀ ਵਾਲਾ ਛਕਿਆ ਕੋਈ ਕਹਿੰਦਾ ਮੈਂ ਐਜੀਪੀ ਸੀ ਦਾ ਛਕਿਆ ਕੋਈ ਕਹਿੰਦਾ ਮੈਂ ਘਰੋਂ ਬੁਲਿਆ ਛਕਿਆ ਥੜੇ ਨੇ ਬੰਡੀਆਂ ਪੈ ਗਈਆਂ ਜੀ ਬੰਡੀਆਂ ਨੇ ਪਰ ਉਹ ਜਿਨ੍ਹਾਂ ਨੂੰ ਜਦੋਂ ਤੁਹਾਨੂੰ ਪ੍ਰੇਰਨਾ ਦਿੰਦੇ ਐ ਬੋਲਦੇ ਨੇ ਦੀ ਫਿਰ ਆਮ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨੂੰ ਪੁੱਛੋ ਵੀ ਦੱਸੋ ਸਤਿਗੁਰ ਕੌਣ ਅਸਲ ਦੇ ਵਿੱਚ ਤਾਂ ਕੋਣ ਕੋਈ ਨਹੀਂ ਕਿਸੇ ਨੇ ਸਤਿਪੁਰਖ ਜਾਨਦੇ ਹੋ ਕਿਸੇ ਨੇ ਨੇ ਉਹਦਾ ਪੁੱਤੀ ਸਾਹਿਬ ਨੂੰ ਸਤਿਗੁਰ ਕਹਿਣ ਲੱਗ ਜਾਂਦੇ ਉਸ ਸਮੇਂ ਵੀ ਇਹ ਹੈਗਾ ਜੀ ਇਹ ਗੁਰੂ ਵਾਲੇ ਦੀ ਤੁਸੀਂ ਬਣੇ ਤੁਸੀਂ ਨਗੁਰੇ ਤੁਸੀਂ ਫਿਰ ਆਲੇ ਪੁੱਤੀ ਸਾਹਿਬ ਦੇ ਦਿੱਤੀ ਐ ਦੀ ਫਿਰ ਪੁੱਤੀ ਸਾਹਿਬ ਦੇ ਨੇ ਆਦਮੀ ਐ ਸਤਿਗੁਰ ਉਹ ਪੌਣ ਵਾਲਾ ਜੇ ਉਹ ਆਦਮੀ ਇੰਨੀ ਕਪੈਸਿਟੀ ਨਹੀਂ ਰੱਖਦਾ ਤਾਂ ਪੌਣ ਨਹੀਂ ਦੇ ਸਕਦਾ ਠੀਕ ਐ ਜਦੋਂ ਕਹਣਾ ਉੱਠ ਕੇ ਥੋੜੀ ਪੌਣ ਦੇਣ ਲੱਗ ਜੂਗਾ ਇਹਨਾਂ ਦਾ ਮਜ਼ਾਕ ਬਣਾ ਲਿਆ ਪੌਣ ਦੇਣ ਨੂੰ ਮੈਨੂੰ ਪੁਰਾਣਾ ਫੌਜਦਾ ਸਿੰਘ ਮਿਲਿਆ ਉਹ ਕਹਿੰਦਾ ਕਿ ਸਿਰਫ ਸਵਈਆਂ ਦਾ ਪਾਠ ਮਾਨੂੰ ਆਉਂਦਾ ਸੀ ਹਾਂ ਉਹ ਕੰਠ ਸੀ ਉਹ ਕਹਿੰਦਾ ਮੈਨੂੰ ਪੰਜ ਪਿਆਰੇ ਚ ਲੈ ਲੈਂਦੇ ਸੀ ਕਿਉਂਕਿ ਦਾ ਪਾਠ ਕੰਠ ਨਹੀਂ ਸੀ ਇਹਨਾਂ ਨੇ ਤਾਂ ਲਿਆ ਉਹ ਜੀ ਜਾਂਦੇ ਤੇ ਫੋੜ ਠੀਕ ਹੈ ਜੀ ਉਹ ਤਾਂ ਹੀ ਫਿਰ ਅੱਜ ਕੱਲ ਉਂਗਲੀ ਉੱਠਦੀ ਹੈ ਜੀ ਬਈ ਤਾਂ ਉੱਥੂ ਦੇਖੋ ਨਾ ਰਵਾਜ ਬਣਾ ਲਿਆ ਅੱਗੇ ਬੁੱਢੇ ਨਾਲ ਦੇ ਵਿੱਚ ਤਿੰਨ ਤਿੰਨ ਸਾਲ ਪੌੜੀ ਦੇੰਦੇ ਆ ਜਾਂਦੇ ਸੀ ਰਹਿੰਦੇ ਸੀ ਉਹ ਕਹਿੰਦੇ ਕੋਈ ਨਹੀਂ ਦਵਾਂਗੇ ਹਾਲੇ ਕੋਈ ਨਧੁਰ ਰੋਟੀ ਕਾਲਦਾ ਹਾਲ ਕੋਈ ਗੱਲ ਨਹੀਂ ਨਾਲ ਹੈ ਤਿੰਨ ਤਿੰਨ ਸਾਲ ਪੌੜੀ ਨਹੀਂ ਦੇੰਦੇ ਕੱਚਾ ਪੱਕਾ ਦੇਖ ਲੈਂਦੇ ਸੀ ਤੈਨੂੰ ਉਹ ਥੇ ਲੋੜ ਹੈ ਬੈਨ ਤਿੰਨ ਸਾਲ ਤੇ ਦੇਖਾਂਗੇ ਤੇ ਹੁਣ ਦਾ ਨਹੀਂ ਬੇਟੀ ਇਹਨੂੰ ਰੁਪਇਆ ਦੇ ਦੋ ਪੌੜ ਲੈ ਲਵੇ ਜੇ ਜਾਂਦਾ ਹੀ ਰਾਜੇ ਲਾਗ ਦੇ ਸਭ ਕੁਝ ਹਾਂਜੀ ਇਹ 13ਵੀਂ ਪੌੜੀ ਦਾ ਉਪਦੇਸ਼ੀ ਹੈ ਜੀ ਪੱਟੀ ਮਹੱਲਾ ਤੀਸਰਾ ਦਾ ਹੁਣ ਝੱਜੇ ਅਖਰ ਤੋਂ ਜੀ ਬਾਬਨ ਅਖਰੀ ਮਹੱਲਾ ਪੰਜਵਾਂ ਜੀ ਚੂਰਨ ਮਿਟੇ ਤੁਮਾਰੋ ਰਾਮ ਨਾਮ ਸਿਉ ਕਰ ਬਿਵਹਾਰੋ ਝੰਗਾ ਜੂਰਨ ਮਿਟੋ ਤੁਮਾਰੋ ਜਿਹੜਾ ਚੋਰਦੈ ਤੂੰ ਤੇਰਾ ਮਿਟੂਗਾ RAM ਨਾਮ ਸਿਉ ਕਰ ਬਿਵਹਾਰੋ RAM ਨਾਮ ਦਾ ਵਪਾਰ ਕਰਦੋ ਨਾਮ ਦੇ ਆ ਨਾਮ ਲੈ ਬਸ ਫੇਰ ਤੂੰ ਵੀ ਚੂਰਦਾ ਆਇਆ ਦਾ ਵਿਕਾਰੇ ਛੱਡ ਦੇ ਆਪਣੇ ਹੰਦ ਦੇ ਰਾਮ ਨਾਲ ਨਾਮ ਦਾ ਵਿਹਾਰ ਕਰ ਹਾਂਜੀ ਹੋਤ ਭਾਉ ਬੀਆ ਖਾਗ ਦੇੜੇ ਛੂਰਦੇ ਰਹਿੰਦੇ ਨੇ ਮਰ ਜਾਂਦੇ ਨੇ ਛੂਰਦੇ ਛੂਰਦੇ ਹੀ ਮਰ ਜਾਂਦੇ ਨੇ ਉਹ ਸਾਖਤ ਕੌਣ ਜਾਣਦੇ ਨੇ ਤੇ ਬੀਆ ਦੂਜਾ ਭਾਉ ਆ ਮਾਇਆ ਦਾ ਮਾਇਆ ਦੇ ਅੰਦਰ ਮਾਇਆ ਦਾ ਪ੍ਰੇਮ ਹੈ ਨਾ ਸੱਚੀ ਬਾਤ ਤੇ ਕੋਈ ਜਗ੍ਹਾ ਨਹੀਂ ਅੰਦਰ ਝੂਠ ਵਾਸਤੇ ਜਗ੍ਹਾ ਹੈ ਬੀ ਆ ਭਾਵ ਮਾਇਆ ਦਾ ਭਾਉ ਹੈ ਜੀ ਦੂਸਰਾ ਦੂਸਰਾ ਮਾਇਆ ਮਾਇਆ ਠੀਕ ਹੈ ਮਾਇਆ ਜਾੜਾ ਹੈ ਜੀ ਛੱਡ ਕੇ ਮਾਇਆ ਦਾ ਭਾਉ ਜਿਹੜੇ ਅੰਦਰ ਹੈਗਾ ਉਹ ਝੂੜਦਾ ਰਹੂਗਾ ਮਾਇਆ ਦੀ ਭੁਖਾਲਾ ਝੂੜੂ ਹੈ ਹਾਂ ਜੀ ਚਰੈ ਕਸੰਮਲ ਪਾਪ ਤੇਰੇ ਮਨੁਆ અમૃત કથા સંત સંગી સુનવા આ ਜਿਹੜੇ માયા ਦਾ રસਨ ਦੇ ਕਸ ਉਹਨਾਂ ਨੇ માયા ਦੇ ਕਸ ਜਿਹੜੇ માયા ਦੇ રસਨスルਜੋ ਕਸ ਨੇ ਜਾਣਗੇ ਤੇ ਤੇ ਜੇ નામ ਦਾ વેપਾਰ કરેਗਾ ਇਹ ਛડ ਜਾਣਗੇ ਜੇ માયા ਦੀ ભૂખ ਜਿਹੜੀ ਅੰਦਰ ਹੈ ਇਹ हट ਨਾਲ ਜੋ ਗੁਰਬਾਣੀ ਕੀ ਕਹਿੰਦੀ ਹੈ ਇਹਨੂੰ ਸੁਣ ਕੇ ਜਦ ਇਹਨੂੰ ਸਮਝੇਗਾ ਤਾਂ ਛੜ ਜਾਣਗੇ ਮਾਇਆ ਦਾ ਜਿਹੜਾ ਜੀ ਤਰ੍ਹਾਂ ਕਿ ਅੰਮ੍ਰਿਤ ਕਥਾ ਸੰਤ ਸੰਗ ਸੁਨੂਆ ਸੰਤ ਸੰਗ ਆਪਣਾ ਰੂਹ ਜੁੜ ਕੇ ਜਿਹੜੀ ਅੰਮ੍ਰਿਤ ਕਥਾ ਸੁਣਨਾ ਗੁਰਬਾਣੀ ਦੀ ਹਰ ਕੀ ਕਥਾ ਇਹਨੂੰ ਸਮਝ ਕੀ ਹੈ ਉਹਨਾਂ ਸਮਝਣਾ ਨਹੀਂ ਜੇ ਸਮਝ ਨਹੀਂ ਆਈ ਤਾਂ ਸੁਣਿਆ ਵੀ ਕੁਝ ਨੀ ਹੈ ਠੀਕ ਹੈ ਜੀ ਕੁਝ ਕਿਹਾ ਸੀ ਆ ਲਿਆਈ ਉਹਨੇ ਹੋਰੇ ਕੋ ਘੜਾਤਾ ਉਹ ਕਹਿੰਦਾ ਤੈਨੂੰ ਮੈਂ ਥੋੜੀ ਗਾਜੀ ਲਾਉਣ ਮੈਨੂੰ ਸੁਣਿਆ ਨਹੀਂ ਸੀ ਸੁਣਿਆ ਤਾਂ ਸੀ ਜੇ ਸੁਣਿਆ ਸੀ ਤਾਂ ਹੀ ਚੀਜ਼ ਲਾ ਕੇ ਦਿੱਤੀ ਆ ਸੀ ਇਹ ਤਾਂ ਉਹਦਾ ਸਮਝਣਾ ਹੀ ਥੋੜਾ ਹੁੰਦਾ ਹਾਂਜੀ ਹਾਂ ਜੇ ਸਭੀਆ ਗੱਲ ਤਾਂ ਸੁਣਿਆ ਹੀ ਨਹੀਂ ਹਾਂਜੀ ਚਿਹਰੇ ਕਾਮ ਕਰੋਧ ਦ੍ਰਿਸ਼ਟਾਈ ਨਾਨਕ ਜਾ ਗੁਸਾਈ ਜੇ ਕੋ ਗੈਰਿੰਦੀ ਕਿਪਾ ਹੁੰਦੀ ਹੈ ਕਾਮ ਕਰੋਦ ਉਹਦਾ ਜਿਹੜਾ ਹੈਗਾ ਬੁੱਧੀ ਦੇ ਵਿੱਚੋਂ ਛੱਡ ਜਾਂਦਾ ਕਾਮਨਾ ਇਛਾ ਮਾ ਅਰ ਕ੍ਰੋਧ ਨਹੀਂ ਮਿਲਦੀ ਕੋਈ ਚੀਜ਼ ਗੁਸਾ ਕੋਈ ਕੰਮ ਸਰੇਣੇ ਚਲੇ ਗੁਸਾ ਹੁੰਦਾ ਕਾਮਨਾ ਹੋਰ ਚੀਜ਼ਾਂ ਬੁੱਧੀ ਤੋਂ ਛੱਡ ਜਾਂਦੀਆਂ ਨੇ ਇਹ ਕਹੇ ਚਰੇ ਕਾਮ ਕ੍ਰੋਧ ਦ੍ਰਿਸ਼ਟਾਈ ਇਹ ਦੋਨਾਂ ਨੂੰ ਦ੍ਰਿਸ਼ਟ ਕਿਹਾ ਹੋਇਆ ਜੀ ਦ੍ਰਿਸ਼ਟਾਈ ਲਿਖਿਆ ਬੁੱਧੀ ਚੋਂ ਬੁੱਧੀ ਹੈ ਨੋ ਬੁੱਧੀ ਇਹਨਾਂ ਨੂੰ ਤਿਆਗ ਦਿੰਦੀ ਹੈ ਹਾਂਜੀ ਨਾਨਕ ਜਾ ਕੋ ਕਿਰਪਾ ਬਸਾਈ ਹਾਂ ਜਿਹਨੂੰ ਵਿਖਾਈ ਦੀ ਕਿਰਪਾ ਹੋ ਜਾ ਜੀ ਤੇ ਉਹਨੂੰ ਮਿਲ ਜਵੇ ਜਿਹਨੂੰ ਉਹਦੇ ਕਾਮਨਾ ਨੀ ਰਹਿੰਦੀ ਮਾਇਆ ਦੀ ਇੱਛਾ ਵੀ ਰਹਿੰਦੀ ਕ੍ਰੋਧ ਵੀ ਨਹੀਂ ਰਹਿੰਦਾ ਹਾਂਜੀ ਠੀਕ ਹੈ ਜੀ ਇੱਥੇ 25ਵੀਂ ਪੌੜੀ ਦਾ ਉਪਦੇਸ਼ ਦੀ ਸਮਾਪਤੀ ਤੇ ਜੋ ਆਪਾਂ ਨੂੰ ਝੱਜੇ ਅੱਖਰ ਤੋਂ ਗਿਆਨ ਪ੍ਰਾਪਤ ਹੋ ਰਿਹਾ ਹੈ ਹੋਏ ਕਿ ਝੂਰਨ ਤੋਂ ਬਚਣ ਵਾਸਤੇ ਸਤਿਗੁਰ ਦੀ ਸ਼ਰਨ ਪੈਣਾ ਪਊਗਾ ਸਤਿਗੁਰ ਦਾ ਉਪਦੇਸ਼ ਸੁਣ ਲੂਗਾ ਤੋਂ ਵੱਜੂਗਾ ਠੀਕ ਹੈ ਤੇ ਸਤਿਗੁਰ ਨੂੰ ਹੀ ਗੁਰ ਮੰਨਣਾ ਹੋਰ ਕਿਸੇ ਤੋਂ ਗੁਰ ਨਹੀਂ ਲੈਣਾ ਗਿਆਨ ਦੀ ਲੈਣਾ ਹੋਰ ਕਿਸੇ ਤੋਂ ਹੋਰ ਕਹੀ ਦੀ ਗੱਲ ਸੁਣਨੀ ਨਹੀਂ ਗੰਗਾ ਗੁਰ ਕੇ ਬਚਨ ਪਛਾਨਣਾ ਦੂਜੀ ਬਾਤ ਦਾ ਧਾਰੀ ਕਰਨਾ ਇਹ ਵੀ ਕਹੀ ਸੀ ਇਹ ਗੱਲ ਛੇ ਗੱਲ ਕਹੀ ਸ਼ੁਰੂ ਚ ਦੂਜੀ ਬਾਤ ਨਹੀਂ ਸੁਣਨੀ ਗੁਰਬਾਣੀ ਤੋਂ ਬਿਨਾਂ ਇਹ ਸੱਚਾ ਗੁਰਬਾਣੀ ਜੋ ਸੁਛਾਏ ਇਹ ਤੇ ਉਲਟ ਗੱਲ ਨੀ ਕੋਈ ਕੋਲੀ ਜੇ ਸੁਣਣ ਦੀ ਮੰਨਣੀ ਨਹੀਂ ਠੀਕ ਹੈ ਜੀ ਇੱਥੇ ਛੱਜੇ ਅੱਖਰ ਤੋਂ ਉਪਦੇਸ਼ ਦੀ ਸਮਾਪਤੀ ਹੈ ਜੀ ਜੀ